ਸਤਿਗੁਰਦੀ ਸਾਜਣਵਾਜੀ ਸਾਧ ਸੰਗਤ ਜੀ ਮੈਂ ਸਾਡੇ ਸੰਤ ਕਮਲਜੀਤ ਸਿੰਘ ਜੀ ਉਸਤਾਦ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ ਹੁਣ ਆਪ ਜੀ ਨੂੰ ਸਭ ਤੋਂ ਪਹਿਲੇ ਆਈਟਮ ਸਾਡੇ ਸੰਤ ਸਰਜੀਤ ਸਿੰਘ ਜੀ ਉਹ ਸਰੰਗੀਵਾਦਕ ਉਹ ਆਪ ਜੀ ਦੇ ਦਰਸ਼ਨ ਕਰਨਗੇ ਅਧੇ ਘੰਟੇ ਵਾਸਤੇ ਉਸ ਤੋਂ ਉਪਰੰਤ ਸਾਡੇ ਸੰਤ ਕਿਰਨਪਾਲ ਸਿੰਘ ਜੀ ਬਾਰੇ ਬਾਰੇ ਸੋ ਆਪ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਇਸੇ ਤਰ੍ਹਾਂ ਚੁਪਤਾ ਦਾਨ ਕਰਨ ਦੀ ਕਿਰਪਾ ਕਰਤਾ ਸਤਿਗੁਰ ਦੀ 사ਜਨ ਵਜ ਸਾਜ ਸਿੰਘ ਜਿੰਨਾ ਚਿਰ ਉਹ ਪਤਨੀ ਸਾਜ ਤਿਆਰੀ ਕਰ ਰਹੇ ਹਨ ਮੈਂ ਸਾਡੇ ਸਤਵਿੰਦਰ ਸਿੰਘ ਜੀ ਭੋਗਲ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਇੱਕ ਸ਼ਬਦ ਉਹ ਜਪ ਤੇ ਯਾਪ ਜੀ ਨੂੰ ਦਰ ਸੁਣਾਉਣਗੇ